ਆਪ بڑے ਭਾਗਾਂ ਵਾਲਿਓ ਸਾਊਥ ਹਾਲ ਦੇ ਵਿੱਚ ਜਾਂ ਲਾਗੇ ਲਸ ਨੂੰ ਇਹ ਚੀਜ਼ ਦਾ ਬੜਾ ਅੰਦਰ ਇੱਕ ਜਲਨ ਜੀ ਰਹਿੰਦੀ ਹੈ ਕਿ ਘਰ ਨਾਮ ਸਿਮਰਨ ਕਰਨਾ ਜਿਹੜਾ ਉਹ ਵੀ ਠੀਕ ਹੈ ਲੇਕਿਨ ਸਾਧ ਸੰਗਤ ਦੇ ਦਰਸ਼ਨ ਬਹੁਤ ਘੱਟ ਹੁੰਦੇ ਆ ਕਿਉਂਕਿ ਕਾਫੀ ਦੂਰ ਆਉਣ ਜਾਣਾ ਪੈਂਦਾ ਨਾਮ ਸਿਮਰਨ ਕਾਲ ਯੁਗ ਦਾ ਕਰਮ ਧਰਮ ਨਾਲ ਕੋਈ ਕੱਲੀ ਕਾ ਜਨ ਚੰਡਾਲ ਕੇ ਕਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਕਾਲ ਯੁਗ ਦਾ ਕਰਮ ਧਰਮ ਕੋਈ ਨਹੀਂ ਹੈ ਜਿਸ ਤਰ੍ਹਾਂ ਪਹਿਲੇ ਯੁਗਾਂ ਦੇ ਵਿੱਚ ਕਰਮ ਧਰਮ ਸੀ ਸਤਜੁਗ ਸਤ ਤ੍ਰੇਤਾ ਜਗੀ ਦਵਪਰ ਪੂਜਾ ਚਾਰ ਤਿੰਨੋ ਯੁਗ ਤਿੰਨੋ ਤੇਰੇ ਕਰ ਕੇਵਲ ਨਾਮ ਅਧਾਰ ਉਹਨਾਂ ਦੇ ਜਪ ਤਪ ਪੁੰਨ ਦਾਨ ਪੂਜਾ ਰਾਗੁਸ਼ ਹੁੰਦਾ ਸੀ ਲੇਕਿਨ ਕਲਯੁਗ ਦੇ ਵਿੱਚ ਇਹ ਇੱਕ ਨਾਮ ਹੀ ਹੈ ਇਸ ਪਰ ਲਿਖਿਆ ਨਾਨਕ ਕੇ ਕਲ ਕੇਵਲ ਨਾਮ ਰਾਮ ਕਲੀ ਦੀ ਵਾਰ ਜੇ ਤਕਰੀਬਨ 900 ਸਾਲ ਪਹਿਰੇ ਤੋਂ ਇੱਥੇ ਸ਼ੁਰੂ ਹੁੰਦੀ ਆ ਉਹਦੇ ਵਿੱਚ ਨਾਮ ਸਿਮਿੰਦਾ ਜਿਗਰ ਕਰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕਿ ਸੰਸਾਰ ਦੇ ਵਿੱਚ ਬੜੇ ਬੜੇ ਆਏ ਤੇ ਉਹ ਇੱਥੋਂ ਦੁਖੀ ਗਏ ਬਗੈਰ ਨਾਮ ਤੋਂ ਰੋ ਕਿੱਥੋਂ ਕਰਦੇ ਨੇ 인ਦਰ ਰਾਜੇ ਤੋਂ ਸੰਸਰਦਾਨ ਦੇ 인ਦਰ ਆਇਆ ਪਰਸ ਰਾਮ ਰੋਗੈ ਕਰ ਆਇਆ ਅਜੈ ਸਰੂਪੈ ਭੀਖਿਆ ਖਾਈ ਐਸੀ ਦਰਗੈ ਮਿਲੇ ਸਜਾਈ ਰੋਗੈ ਰਾਮ ਨਕਾਲਾ ਪਇਆ ਸੀਤਾ ਲਖਣ ਵਿਛੜ ਗਿਆ ਰੋਵੇ ਦੈਸ ਲੰਕ ਗਵਾਏ ਜਿਨ ਸੀਤਾ ਆਂਦੀ ਡੌਰੂ ਬਏ ਰੋਵੇ ਪਾਂਡਵ ਪਏ ਮਜੂਰ ਜਿਨ ਕੇ ਰਹਿਤ ਜੂਰ ਰੋਬੇ ਜਨਮੇ ਜਾ ਕੋਈ ਗਿਆ ਇਹ ਕੀ ਕਾਰਨ ਪਾਪੀ ਭਇਆ ਰੋਵੇ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੇ ਪੀੜ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਪੀਖਿਆ ਜਾਏ ਕਿਰਪਨ ਰੋਵੇ ਸੰਚੇਤਨ ਜਾਏ ਅਗਿਆਨੀ ਰੋਵੇ ਗਿਆਨ ਗਵਾਏ ਬਾਲੇ ਰੋਵੇ ਨਾਏ ਨਾਨਕ ਤੁਖਿਆ ਸਭ ਸੰਸਾਰ ਮਨ ਨੇ ਨੌ ਸੁਈ ਜਣ ਜਾਏ ਔਰੀ ਕਰਮ ਨਾ ਲੇ ਗਲੇ ਆਏ ਇਹਦੇ ਵਿੱਚ 12 ਮਸਾਲਾ ਦਿੱਤੀਆਂ ਰਾਜੇ ਇੰਦਰ ਤੋਂ ਲਾ ਕੇ ਕਿਉਂਕਿ ਜਿੰਨੇ ਰਾਜੇ ਇੰਦਰ ਨੂੰ ਸੁਖ ਨੇ ਉਹਨੇ ਸੁਖ ਸਵਰਗ ਦੇ ਰਾਜੇ ਨੂੰ ਉਹਨੇ ਸੋਖੇਤੀ ਕਿਸੇ ਨੂੰ ਇਸ ਸੰਸਾਰ ਦੇ ਵਿੱਚ ਨਹੀਂ ਹੈ ਉਤੋਂ ਸ਼ੁਰੂ ਕੀਤਾ ਹਰਾਵਨ بڑے بڑے ਆਪ ਜੀ ਨੇ ਸੁਣਿਆ ਇਹਦੇ ਵਿੱਚ 12 ਮਸਾਲਾ ਕੇ بڑے بڑے ਰਾਜੇ ਮਹਾਰਾਜੇ ਇੱਥੋਂ ਨਾਮ ਤੋਂ ਬਗੈਰ ਹੁੰਦੇ ਗਏ ਬਾਲੀ ਰੋਗੈ ਨਾਹੀਂ ਪਧਾਰ ਬਾਲੀ ਇੱਕ ਲੜਕੀ ਉਹ ਹੁੰਦੀ ਹੈ ਕਿ ਸੱਚੇ ਪਾਤਸ਼ਾਹ ਵੀ ਮੇਰੇ ਵਾਸਤੇ ਕੋ ਅੱਛਾ ਜਿਹਾ ਪਤੀ ਵੀ ਨਹੀਂ ਹੈ ਮੈਨੂੰ ਜਨਦਾ ਦਿੱਤਾ ਲੇਕਿਨ ਪਤੀ ਵੀ ਬਖਸ਼ਦੇ ਤੇ ਅੱਜਕੱਲ ਦਾ ਬਹੁਤ ਹੀ ਕੰਮ ਜਲਦਾ ਤੇ ਤੁਝ ਜਾਣੇ ਸਾਰੇ ਕਿ ਇਦਾਂ ਦਾ ਕੰਮ ਕਾਫੀ ਮੁਸ਼ਕਲ ਜਾਪਿਆ ਹੈ ਤੇ ਮੇਰੇ ਬਾਅਦ ਸੇ ਕੋ ਚੰਗਾ ਜਾਂ ਪਤੀ ਬਖਸ਼ ਤੇ ਕਹਿੰਦੇ ਨੇ ਮਨ ਨੇ ਨੌ ਸੋਈ ਜਾਏ ਔਰੀ ਗਰਮ ਨ ਲੈ ਖਿ ਲਾਏ ਜਿਹੜਾ ਨਾਮ ਦੀ ਮਾਨਤਾ ਕਰਦਾ ਨਾਮ ਦੀ ਮਾਨਤਾ ਕੀ ਹੈ ਕਿ ਨਾਮ ਨਾਮ ਕੇ ਜੋ ਨਾਮ ਜੋ ਨਾਮ ਜੋ ਬੋ ਆਪ ਆਮ ਆ ਬਾਦ ਧਰਮ ਉਸਾਨਤ ਜਾਈ ਦਾ ਨਾਮ ਜੋ ਬੋ ਨਾਮ ਜੋ ਕੋ ਵੀ ਨਾਮ ਜਪਣਾ ਕਿਹੜਾ ਤੇ ਕਿੱਥੇ ਜਪਣਾ ਕਦੋਂ ਜਪਣਾ ਉਹ ਨਹੀਂ ਉਹ ਬਹੁਤ ਘਟ ਹੈ ਤੇ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰ ਪ੍ਰਤਾਪ ਸਿੰਘ ਸਤਿਗੁਰ ਜਗਜੀਤ ਸਿੰਘ ਜਿਨ੍ਹਾਂ ਨੇ ਕਿਰਪਾ ਕੀਤੀ ਹੈ ਤੇ ਦੱਸਿਆ ਆਪ ਜਪਦੇ ਨੇ ਤੇ ਸਾਨੂੰ ਨਾਲ ਬਿਠਾਉਂਦੇ ਨਾਮ ਜਪਦੇ ਨੇ ਕਿ ਨਾਮ ਨਮ ਕੋਈ ਜੋ ਨਾਮ ਜਪੋ ਨਾਮ ਜੋ ਇਸ ਸੋਖਣੀ ਸਾਹਿਬ ਚ ਲਿਖਿਆ ਹੈ ਜੈ ਮਾਰ ਕੇ ਗਣੇ ਜਾਇ ਨ ਕੋਸਾ ਹਰ ਕਾ ਨਾਮੁ ਆਵਾ ਸੰਤੋਸਾ ਜੈ ਭੈਂਡੇ ਮਹਾ ਅੰਤ ਗਵਾਰਾ ਹਰ ਕਾ ਨਾਮ ਸੰਗੁ ਉਜਾਰਾ ਜਹੰ ਪੰਤ ਤੇਰਾ ਕੋ ਨ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾ ਭਿਆਨ ਤਪ ਤਬੋ ਕਾਮ ਤੈ ਹਰ ਕੀ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਕਾ ਮੰਤੁਜ ਆਕਰਖੈ ਤੈ ਨਾਨਕ ਹਰ ਹਰ ਅੰਗ ਇਹ ਉਦੋਂ ਦੀ ਗੱਲ ਲਿਖੀ ਆ ਜਦੋਂ ਅਸੀਂ ਸੰਸਾਰ ਤੋਂ ਛੱਡ ਕੇ ਜਾਣਾ ਤੇ ਸਾਡੇ ਨੇ ਕਿਸੇ ਸਾਡੇ ਨਾਲ ਨਹੀਂ ਜਾਣਾ ਨਾਲ ਨਹੀਂ ਜਾਣਾ ਸਾਡੇ ਨੇ ਤੇ ਮਰ ਹਟ ਲੱਗ ਸਭ ਲੋਕ ਕਟੰਬ ਪਿਓ ਹੰਸ ਅਕੇਲਾ ਜਾਏ ਵੈਸ ਤੋਂ ਵੈ ਬਤ ਪਾਰਨ ਬਹੁੜ ਨ ਦੇਖੇ ਆਏ ਨਾ ਕਿਸੇ ਰਿਸ਼ਤੇਦਾਰ ਨੇ ਇਸ ਨੇ ਧੀਆਂ ਪੁੱਤਰ ਨਾ ਕੋ ਬੈਂਕ ਬੈਂਸੀ ਨਾਲ ਜਾਣਾ ਕਿ ਪੈਸੇ ਰੱਖਦੀ ਨਾਲ ਲੈ ਜੇ ਇਹ ਸਾਡੀ ਪਹੁੰਚ ਕਿਸੋ ਤੱਕ ਹੋਣੀ ਹੈ ਸ਼ਮਸ਼ਾਨ ਭੂਮੀ ਤੱਕ ਉਦੋਂ ਅੱਗੇ ਹੰਸ ਇਕੱਲਾ ਅੱਗੇ ਫਿਰ ਆਦਮੀ ਇਕੱਲਾ ਜਾਣਾ ਪਰ ਉੱਥੇ ਸਹਦਾ ਕਰਨੀ ਹੈ ਉਹ ਗੁਰੂ ਅਰਜਨ ਦੇਵ ਜੀ ਸੋਖਣੇ ਸਾਹਿਬ ਚ ਲਿਖਦੇ ਨੇ ਕਿ ਉੱਥੇ ਨਾਮ ਨੇ ਸਹਤਾ ਕਰਨੇ ਨਾਮ ਨੇ ਸਹਦਾ ਕਰਨੀ ਤੇਰੀ ਨਾਮ ਨੇ ਸਹਦਾ ਕਰਨੀ ਉੱਥੇ ਨਾਮ ਨੇ ਸਹਦਾ ਕਰਨੀ ਹੈ ਕਿਸੇ ਨੂੰ ਉੱਥੇ ਕੰਮ ਨਹੀਂ ਆਉਣਾ ਬਾਬ ਨਖਰੀ ਦੇ ਵਿੱਚ 250 ਤੋਂ ਸ਼ੁਰੂ ਹੁੰਦੀ ਹੈ ਬਾਬ ਨਖਰੀ ਗੁਰੂ ਅਰਜਨ ਦੇਵ ਜੀ ਨੇ ਲਿਖਦੇ ਨੇ ਰ ਆ ਰਾ ਰੰਗੋ ਏ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਤੇ ਹੋਏਗਾ ਕੀ ਰੇ ਦੇ ਦਰਗਹਿ ਕਹਿ ਨਕਉ ਆਉ ਬੈਠ ਆਦਰ ਸੁਦੇਵ ਉਹ ਮਹਿਲੀ ਪਾਵੇ ਤੂ ਬਾਸਾ ਜਨਮ ਮਰਨੈ ਹੋਈ ਬਨਾਸਾ ਜੇ ਤੁਸੀਂ ਇਸ ਮਨ ਨੂੰ ਇਹ ਮਨ ਹੁ ਰੰਗਿਆ ਕਾਦੇ ਨਾਲੇ ਕਾਮ ਕ੍ਰੋਧ ਲੋਭ ਹੰਕਾਰ ਈਰਖਾ ਦਵੇਜ ਚੁਗਲੀ ਚੁਗਲੀਆਂ ਜਿਹੜੀਆਂ ਮਰਜੀ ਕਰੇ ਜੋ ਅਸੀਂ ਸੁਣ ਕੇ ਬੜੇ ਖੁਸ਼ ਹੁੰਨੇ ਆ ਮੈਂ ਵੀ ਵਿਚਿਆਂ ਮੈਂ ਤੁਹਾਡਾ ਵੀ ਮਾੜਾ ਤੇ ਬੜੀ ਖੁਸ਼ੀ ਹੁੰਦੀ ਆ ਵੀ ਹਾਂਜੀ ਹੋਰ ਕਾਰਨ ਦੋ ਚਾਰ ਗੱਲਾਂ ਤੇ ਹੋਰ ਸੁਣ ਲਈਏ ਤੇ ਗੱਲਾਂ ਬਾਤਾਂ ਤੇ ਲੇਕਿਨ ਇਹ ਆ ਇਹ ਡਾਊਨ ਫੌਲਿਓ ਦਾ ਕੋਈ ਫਾਇਦਾ ਨਹੀਂ ਹੈ ਇਹ ਕੀ ਤੱਕਰਾ ਖੂਜ ਬੁੰਦੀ ਝੂਠ ਕਲਯੁਗ ਦਾ ਸਭ ਤੋਂ ਵੱਡਾ ਹਥਿਆਰ ਕਿਹੜਾ ਝੂਠ ਉਹ ਕਿਸ ਤਰ੍ਹਾਂ ਕਲ ਆਈ ਕੁੱਤੇ ਮੂਈ ਖਾਜ ਹੋਆ ਮਰਦਾਰ ਕੂੜ ਬੋਲ ਬੋਲ ਭੋਕਣਾ ਚੂਕਾ ਤੰਗਚਾਲ ਕਲਯੁਗ ਆ ਗਿਆ ਤੇ ਬੁਰਤੀ ਹੋਈ ਕੁੱਤਿਆਂ ਦੀ ਕੁੱਦੇ ਕੀ ਕਰਦੇ ਆ ਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ ਉਹ ਕਹਿੰਦੇ ਕੁੱਤੇ ਦਾ ਕੰਮ ਕੀ ਹੁੰਦਾ ਨਾਲ ਤਾਂ ਮਰਦਾਰ ਖਾਂਦਾ ਬਿਸ਼ਟਾ ਨਾ ਬੂੰ ਬੂੰ ਬੂੰ ਕਰਦਾ ਤੇ ਇਸੇ ਤਰ੍ਹਾਂ ਇਦਾਂ ਹੀ ਕਲਯੁਗ ਦੇ ਬੰਦੇ ਜੇ ਝੂਠ ਬੋਲ ਬੋਰ ਕੇ ਸੱਚ ਬਣਾਉਣ ਦੀ ਖਾਤਰ ਉਹ ਭੌਂਕੀਆਂ ਕਰਨਗੇ ਤਾਂ ਸੱਚ ਤਾਂ ਨਹੀਂ ਬਣਦਾ ਝੂਠ ਇਹ ਜਿਹੜਾ ਇਹ ਸਾਡਾ ਮਨ ਇਸ ਚੀਜ਼ ਨਾਲ ਰੰਗਿਆ ਆ ਤੇ ਉਹ ਉੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਰਾਹ ਰਾ ਰੰਗੋ ਇਹ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਾ ਇਹਨੂੰ ਆਪਣੇ ਨਾਮ ਦੇ ਨਾਲ ਰੰਗ ਨਾਮ ਨੂੰ ਇਹਨੂੰ ਮਨ ਨੂੰ ਨਾਮ ਤੇ ਨਾ ਰੰਗੋ ਤਾਂ ਫੇਰ ਤੁਹਾਨੂੰ ਜਿਸ ਵੇਂ ਦਰਗਾਹ ਦੇ ਪੇ ਜਾਉਂਗੇ ਉੱਤੇ ਤਾਂ ਉੱਥੇ ਕੋਈ ਰੇਰੇ ਨਹੀਂ ਕਹੇਗਾ ਤੁਹਾਡੀ ਨਰਾਜ਼ਗੀ ਨਹੀਂ ਹੋਏਗੀ ਆਓ ਬੈਠ ਆਦਰ ਸੁਭਦੋ ਤੁਹਾਨੂੰ ਆਉਣਗੇ ਆ ਕੇ ਬਹਿਣਗੇ ਆ ਉਸਤਾਨ ਬੈਠੋ ਨਹੀਂ ਤਾਂ ਉੱਥੇ ਕਿਸੇ ਨੇ ਪੁੱਛਣਾ ਉੱਥੇ ਕੋਈ ਸੰਗ ਸਾਥੀ ਨਹੀਂ ਹੋਣਾ ਸਾਰੇ ਇੱਥੇ ਰਹਿ ਜਾਣੇ ਆ ਤੇਰੇ ਬੈਂਕਾਂ ਦੇ ਬੈਲੈਂਸ ਬਿਲਡਿੰਗਾਂ ਵਗੈਰਾ ਜੋ ਕੁਛ ਨਹੀਂ ਦੇਖਦੇ ਆ ਇਹ ਇੱਥੇ ਰਕੇ ਨਾਲ ਧੋੜ ਗਿਆ ਕਿ ਨਾਲ ਤੇ ਕੋਈ ਜਾਂ ਚੀਜ਼ ਜਾਂਦੀ ਨਹੀਂ ਹੈ ਲੇਕਿਨ ਨਾਲ ਜਾਂਦੀ ਆਪ ਨੇਕੀ ਨਾਲ ਜਾਂਦਾ ਨਾਮ ਜਪਿਆ ਆ ਤੇ ਇਸ ਕਰਕੇ ਨਾਮ ਜਿਹੜਾ ਹੈ ਇਹ ਕਲਯੁਗ ਦਾ ਜਿਹੜਾ ਧਰਮ ਹੈ ਗੁਰੂ ਨਾਨਕ ਦੇਵ ਨੇ ਇਹ ਯੁਗ ਦੇ ਵਿੱਚ ਕਿਉਂ ਗੁਰੂ ਨਾਨਕ ਦੇਵ ਸ਼ਰੋਮਣੀ ਅਵਤਾਰ ਆਏ ਕਲਯੁਗ ਦੇ ਵਿੱਚ ਕਬੀਰ ਭਗ ਸ਼ਰੋਮਣੀ ਭਗਤਾ ਹੈ ਤੇ ਗੁਰੂ ਨਾਨਕ ਦੇਵ ਨੇ ਨਾਮ ਹੀ ਲਿਆਂਦਾ ਨਾਨਕ ਕੇ ਕਰ ਕੇਵਲ ਨਾਮ ਤਾਂ ਉਸ ਨਾਮ ਦਾ ਜਾਪ ਆਪ ਜੀ ਨੇ ਕੀਤਾ ਇੱਕ ਥੋੜੀ ਧਾਰਨਾ ਪੜ ਲਈ ਉਹਦੋਂ ਬਾਅਦ ਟਾਈਮ ਵੀ ਹੋ ਜਾਣਾ ਵਰਡੇ ਵਰਡੇ ਦੁਨੀਆ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾ ਵਰਡੇ ਵਰਡੇ ਦੁਨੀਆ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾ ਵੜਦੇ ਵੜਦੇ ਦੁਨੀਆ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾ ਵੜਦੇ ਵੜਦੇ ਦੁਨੀਆ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾ ਰਉਂਦੇ ਗਏ ਨਾਮ ਤੋਂ ਬਿਨਾਂ ਰਉਂਦੇ ਗਏ ਨਾਮ ਤੋਂ ਬਿਨਾਂ ਰਉਂਦੇ ਗਏ ਨਾਮ ਤੋਂ ਬਿਨਾਂ ਰਉਂਦੇ ਗਏ ਨਾਮ ਤੋਂ ਬਿਨਾਂ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 ਰੋਂਦੇ ਗਏ ਨਾਮ ਤੋਂ ਬਿਨਾ ਤੇ ਸਾਡੇ ਵਰਗਿਆਂ ਦੀ ਗੱਲ ਤਾਂ ਕੀ ਆ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਵੱਡੇ ਅਜਾਤ 12 ਮਸਾਲਾ ਦਿੱਤੀਆਂ ਉਹਦੇ ਵਿੱਚ ਵੱਡੇ ਵੱਡਿਆਂ ਦਾ ਜ਼ਿਕਰ ਕੀਤਾ ਕਿ ਉਹ ਵੀ ਇਸ ਸੰਸਾਰ ਤੋਂ ਰੋਂਦੇ ਗਏ ਤਾਂ ਖੀਤੇ ਕੀ ਲਿਖਿਆ ਮੰਨੇ ਨਾਉਂ ਸੋਈ ਕਈ ਇਹ ਗੱਲ ਕਹਿੰਦੇ ਆ ਭਾਈ ਹੋਰ ਤਾਂ ਪੜ ਲੈਂਦੇ ਆ ਮੰਨੇ ਨਾਮ ਸੁਈ ਜਨ ਜਾਏ ਔਰੀ ਕਰਮ ਨ ਲਿਖੇ ਲਾਏ ਹੋਰ ਕਿਸੇ ਕੰਮ ਦੇ ਨਾਲ ਤੁਸੀਂ ਇਸ ਭਵ ਸੰਸਾਰ ਨੂੰ ਪਵ ਸਾਗਰ ਸੰਸਾਰ ਨੂੰ ਤਰ ਨਹੀਂ ਸਕਦੇ ਇੱਕ ਨਾਮ ਦੇ ਨਾਲ ਹੀ ਤਰ ਸਕਦੇ ਆ ਤੇ ਨਾਮ ਜਪੋ ਤੇ ਇਹ ਜਿਹੜੀਆਂ ਸਾਡੇ ਅੰਦਰ ਜਿਹੜਾ ਮਨ ਰੰਗਿਆ ਆ ਕਾਮ, ਕ੍ਰੋਧ, ਲੋਭ, ਹੰਕਾਰ ਇਹ ਪੰਜ ਬੜੇ ਵੈਰੀ ਜਿਹੜੇ ਅੰਦਰ ਬੈਠੇ ਆ ਜੇਨੇ ਮੇਲੇ ਮਾਰੀ ਪੰਜ ਸੂਰੂਰ ਐਸੋ ਕੌਣ ਬਧੀਰੇ ਏਦਾਂ ਗੁਰੂ ਗੋਬਿੰਦ ਸਿੰਘ ਮਾਰ ਲਿਖਿਆ ਕਿ ਇਹ ਜਿਹੜਾ ਮਦ ਏਦਾਂ ਦਾ ਕੌਣ ਜੋਧਾ ਜਿਹਨੇ ਪੰਜਾਂ ਨੂੰ ਮਾਰਿਆ ਤੇ ਉਸ ਤੋਂ ਬਾਅਦ ਈਰਖਾ ਦਬੈਤ ਜੁਗਲੀ ਨਿੰਦਿਆ ਇਸ ਚੀਜ਼ ਨੂੰ ਬਾਹਰ ਕੱਢੋ ਨਾਮ ਜਪੋ ਸਤਗੁਰ ਰਾਮ ਸਿੰਘ ਦਾ ਹੁਕਮ ਸੀ ਕਿ ਜਿੱਥੇ ਨਾਮ ਹੋਏਗਾ ਉੱਥੇ ਸਾਰੇ ਸੁਖਗ੍ਰਿਤ ਆ ਜਾਣਗੇ ਦੋਗ੍ਰਿਤ ਚਲੇ ਜਾਣਗੇ ਦੋਗ੍ਰਿਤ ਸੁਖਗ੍ਰਿਤ ਥਾਰੂ ਕਰਮਰੀ ਇਹ ਜਿਹੜੀਆਂ ਭਾਵ ਹੈ ਕਿ ਜਿੱਥੇ ਨਾਮ ਦਾ ਸਿਮਰਨ ਹੋਏਗਾ ਸਾਰੀਆਂ ਚਿੰਗਿਆਈਆਂ ਆ ਜਾਣਗੀਆਂ ਤੇ ਬੁਰਾਈਆਂ ਚਲ ਜਾਣਗੀਆਂ ਤੇ ਹੁਣ ਮੈਂ ਇੱਕ ਦੋ ਮਿੰਟ ਸਾਡੇ ਸੰਤ ਫੋਮਨ ਸਿੰਘ ਜੀ ਕਮਲ ਜਿਹੜੇ ਕਿ ਨੈਰੂਬੀ ਤੋਂ ਇੰਡੀਆ ਚਲੇ ਗਿਆ ਸੀ ਇੰਡੀਆ ਦਿੱਲੀ ਉੱਤਮ ਨਗਰ ਰਹੇ ਨੇ ਉੱਥੇ ਕੋਟੀ ਸੀ ਇਹਨਾਂ ਦੀ ਤੇ ਉੱਥੇ ਦਾਸ ਵੀ ਕੁ ਦਫਾ ਮਿਲਣ ਵਾਸਤੇ ਗਿਆ ਸੀ ਉਸ ਵਾਰ ਥੋੜੀ ਤਕਲੀਫ ਹੋ ਗਈ ਤਾਂ ਭੈਣੀ ਸਾਹਿਬ ਆ ਗਏ ਭੈਣੀ ਸਾਹਿਬ ਵੀ ਕਾਫੀ ਦੇ ਰਹੇ ਨੇ ਤੇ ਹੁਣ ਉਥੋਂ ਕੁਵੈਂਟੀ ਆਪਣੇ ਲੜਕੇ ਕੋ ਹਰਜਿੰਦਰ ਸਿੰਘ ਕਮਲ ਉਹਨਾਂ ਕੋ ਆ ਗਏ ਨੇ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਮੈਂ ਬੇਨਤੀ ਕੀਤੀ ਤੁਸੀਂ ਕੋਲ ਹੀ ਆ ਜਾਓ ਪਰ ਅਫਸੋਸ ਵਾਲੀ ਗੱਲ ਹੈ ਕਿ ਮਿਲ ਨਹੀਂ ਹੁੰਦਾ ਇੱਥੇ ਅਨੁਭਵੀ ਰੋਜ਼ ਵਿਚਾਰ ਕਰ ਲਈ ਸੀ ਉਦਾਂ ਇੱਥੇ ਨਹੀਂ ਮਿਲ ਹੁੰਦਾ ਇੱਥੇ ਦੂਰ ਦੂਰ ਰਹਿੰਦੇ ਆ ਤੇ ਇਹਨਾਂ ਨੇ ਕਾਫੀ ਸੇਵਾ ਕੀਤੀ ਹੈ ਇਸ ਵੇਲੇ ਕੰਬਾਲੀ ਸੀ ਸਤਗੁਰੂ ਪ੍ਰਤਾਪ ਸਿੰਘ ਹੋਲਾ ਕੀਤਾ ਤੇ 150 ਪਾਠਾਂ ਦੀ ਭੋਗ ਪਾਈ ਸੀ ਦੋਸ ਦਸਮਗੰਗਾ ਦੀ ਪਾਰਟੀ ਉਹਨੂੰ ਇਹੀ ਸੇਵਾ ਕਰ ਰਹੇ ਸੀ ਇਹੀ ਸਾਡੇ ਨਾਲ ਸੀ ਦਸਮਗੰਗਾ ਦਾ ਪਾਠ ਇਹਨਾਂ ਨੇ ਕੀਤਾ ਸੀ ਤਿਗਦਾਸ ਨੇ ਕੀਤਾ ਸੀ ਤੇ ਘਰ ਬਹੁਤ ਹੀ ਲੰਬੀ ਕਹਾਣੀ ਆ ਇਹਨਾਂ ਨੇ ਕਾਫੀ ਲਿਟਰੇਚਰ ਵੀ ਲਿਖਿਆ ਬੁੱਕਾਂ ਵੀ ਕਾਫੀ ਲਿਖੀਆਂ ਔਰ ਬੁੱਕਾਂ ਰੋ ਵੀ ਵੇਚੇ ਇਹ ਨਹੀਂ ਕੋ ਡਰ ਕੇ ਤੇ ਸਾਹਮਣੇ ਬੰਡੀਆਂ ਹੈ ਕਿ ਜਿੰਨ ਜਿਹੜੀ ਮਰਜ਼ੀ ਜੋ ਕਰਨਾ ਕਰ ਲਓ ਤਾਂ ਦਾਸ ਨੂੰ ਬੜੀ ਖੁਸ਼ੀ ਹੋਈ ਹੈ ਟੈਲੀਫੋਨ ਦੋ ਵਾਰ ਕੀਤਾ ਸੀ ਇਹਨਾਂ ਨੂੰ ਪਰ ਇਹ ਹੈ ਕਿ ਮੇ ਤੋਂ ਕੁਵੈਂਟੀ ਜਾ ਨਹੀਂ ਹੋਇਆ ਮਿਲਣੀ ਹੋਇਆ ਤੇ ਉਹਨਾਂ ਬੜੀ ਖੁਸ਼ੀ ਆ ਜਿਉਂ ਨੇ ਦਰਸ਼ਨ ਹੋਏ ਨੇ ਸਾਹਿਤ ਸੰਗਤ ਦੇ ਵਿੱਚ ਆਏ ਨੇ ਇਹਨਾਂ ਤੋਂ ਅਸੀਂ ਕਾਫੀ ਫਾਇਦਾ ਉਠਾ ਸਕਦੇ ਆਂ ਕੁਛ ਲਿਖਣ ਬਾਰੇ ਇਹ ਚੰਗੇ ਰਾਈਟਰ ਨੇ ਭਾਵ ਹੈ ਕਿ ਲਿਖਦੇ ਨੇ ਤੇ ਇਹਨਾਂ ਤੋਂ ਅਸੀਂ ਕਾਫੀ ਹੋਰ ਵੀ ਕਾਫੀ ਇਤਿਹਾਸ ਲਿਟਰੇਚਰ ਪੁੱਛ ਸਕਦੇ ਆਂ ਇਹ ਸਾਨੂੰ ਦੱਸ ਸਕਦੇ ਆਂ ਤੇ ਅਸੀਂ ਇਕੱਠੇ ਇਕੱਠੇ ਕਾਫੀ ਦੇਰ ਨਰੂਭੀ ਇਕੱਠੇ ਰਹੇ ਆਂ ਔਰ ਕਾਫੀ ਵਿਚਾਰਾ ਕਰਦੇ ਰਹੇ ਆਂ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਆਏ ਨੇ ਤੇ ਇਹਨਾਂ ਨੇ ਤੀਏ ਦੌਰੇ ਤੇ ਲਾ ਕੇ ਕਾਫੀ ਸੇਵਾ ਕੀਤੀ ਆ ਤੇ ਇਹਨਾਂ ਦੀ ਸੇਵਾ ਦਾ ਹੈ ਇਹ ਬਹੁਤ ਸਾਨੂੰ ਇਹਨਾਂ ਤੇ ਮਾਣ ਹੈ ਕਿ ਭਾਵੇਂ ਇਹਨਾਂ ਨੇ ਇੰਨੀ ਸੇਵਾ ਕੀਤੀ ਆ ਤੇ ਇਹਨਾਂ ਨੇ ਅੱਜ ਦਰਸ਼ਨ ਦਿੱਤੇ ਨੇ ਇੱਥੇ ਆਏ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵੈਲਕਮ ਜੀ ਆਨਵਾਗਦੇ ਆਂ ਪ੍ਰਸਾਦ ਸਿੱਤੇ ਕਿੰਮਾ ਜਾਗੀ ਕਾ ਭੁੱਲ ਜੁਗ ਦੀ ਖਿਮਾ ਤੇ ਦਾਤ ਸਾਥ ਸੰਗਤ ਦਾ ਸਤ ਜੀ ਸੇਕਟਰੀ ਸਾਰੀ ਸਾਧ ਸੰਗਤ ਦਾ ਬਹੁਤ ਧੰਨਵਾਦ ਹੈ ਕਿ ਜਿਨੇ ਅਦਾਸ ਸੰਗਤ ਦੇ ਦਰਸ਼ਨ ਕਰਨ ਵਾਸਤੇ ਟਾਈਮ ਦਿੱਤਾ ਹੈ ਤੇ ਜਿੰਨੀ ਵੱਧ ਤੋਂ ਵੱਧ ਸਾਧ ਸੰਗਤ ਇੱਥੇ ਆਵੇ ਆ ਕੇ ਇਕੱਠੇ ਬੈਠ ਕੇ ਸਾਧ ਸੰਗਤ ਦੇ ਵਿੱਚ ਨਾਮ ਸਿਮਰਨ ਕਰੋ ਸਾਧ ਸੰਗਤ ਦਾ ਫਲ ਬਹੁਤ ਹੈ ਵੱਡੇ ਭਾਗ ਸਾਧ ਸੰਗਤ ਪਾਵੈ ਭਾਗਹੀਨ ਪਰਮਪ ਚੋਟਾਂ ਖਾਵੈ ਬਿਨ ਬਾਗਾ ਸਤ ਸੰਗ ਨ ਸੰਗਤ ਮੈਲ ਭਰੀ ਜੈ ਜੀਓ ਸਾਥ ਸੰਗਤ ਬਗੈਰ ਭਾਗਾ ਤੋਂ ਨਹੀਂ ਮਿਲਦੀ ਤੇ ਸਾਥ ਸੰਗਤ ਤੋਂ ਬਗੈਰ ਇਹ ਅੰਦਰ ਤੇਰੀ ਮੈਲ ਭਰੀ ਰਹਿੰਦੀ ਆ ਇਹ ਤੇ ਅਸੀਂ ਮੈਲ ਕਢਣੀ ਆ ਆਕੇ ਇਥੋਂ ਮੈਲ ਹੋਰ ਨਹੀਂ ਲਾ ਕੇ ਜਾਣੀ ਨਾਲ ਕਿ ਜਾਰ ਗਲੀਆਂ ਉਹਦੀਆਂ ਕਾਲੀਆਂ ਜਾਰ ਉਹਦੀਆਂ ਕਾਲੀਆਂ ਘਰ ਜਾ ਕੇ ਗਾਲੀਆਂ ਉੱਤੇ ਕੁਝ ਨਹੀਂ ਸੀ ਐ ਨਹੀਂ ਸੀ ਇਦਾਂ ਦੀ ਗਾਮ ਕਰਨਾ ਚਲਦੀ ਆ ਨਹੀਂ ਇੱਥੇ ਜੋ ਕੁਝ ਸਿੱਖਣਾ ਸੀ ਅਸੀਂ ਸਿੱਖ ਕੇ ਜਾਈਏ ਆਪਣਾ ਜਨਮ ਸਫਲਾ ਕਰੀਏ ਲੋਕ ਸੁਖੇ ਪਰ ਲੋਕ ਸੋਇਲੇ ਨਾਨਕ ਹਰ ਪਾਪ ਆਪੇ ਮਿਲੇ ਪਰ ਜੋਗਦੀ ਖਿਮਾ ਫੇਵੀ ਮੇਰੇ ਸਿਰ ਤੇ ਹੱਥ ਰੱਖਿਓ ਸਿਰ ਤੇ ਹੱਥ ਰੱਖਿਓ ਕਿਰਪਾ ਕਰਿਓ ਕਿ ਮੈਂ ਤੁਹਾਡੇ ਆਗੇ ਹਰੇਕ ਹfte ਸਾਧ ਦਰਸ਼ਨ ਕਰਦਾ ਰਹਾ ਪਰ ਜੋਗਦੀ ਖਿਮਾ ਸਤਿ ਸ੍ਰੀ ਅਕਾਲ